ਦੋਹਰਾ ਕ੍ਰਿਸ਼ਨ ਮਨਾਇਤ ਰੀਦ ਕੈ ਮੁਰਲੀ ਉਠਿਓ ਬਜਾਏ ਰੀਦ ਰਹੀ ਸਭ ਗੋਪੀਆਂ ਮਹਾ ਪ੍ਰਮੋਦ ਮਨ ਪਾਏ ਸੁਇਆ ਰੀਦ ਰਹੀ ਬ੍ਰਿਜ ਕੀ ਸਭ ਭਾਵ ਮਨ ਮੁਰਲੀ ਨੰਦ ਲਾਲ ਬਜਾਈ ਰੀਜ ਰਹੇ ਬਨ ਕੇ ਖਾਗਿਓ মৃਗ ਰੀਦ ਰਹੇ ਤੁਨ ਜਾ ਪਾਈ ਚਿੱਤਰ ਕੀ ਹੋਏ ਗਈ ਪ੍ਰਿਤਮਾ ਸਭ ਸ਼ਾਮ ਕੀ ਓਰ ਰਹੀ ਲਵਲਾਈ ਨੀਰ ਬਹੈ ਨਹੀਂ ਕਾਨ ਤ੍ਰਿਆ ਸੁਨ ਕੈ ਤਹ ਪੌਣ ਰਹੋ ਹੁਰਜਾਈ ਬਹੁਣ ਰਹੋ ਕਰੀ ਘਰੀ ਇਕ ਨੀਰ ਨਦੀ ਕੋ ਚਲੇ ਸੋ ਕਚੂ ਨਾਮ ਜੇ ਬ੍ਰਿਜ ਭਾਵਨ ਆਏ ਹੁਤੀ ਤਰ ਖਾਸ ਅੰਹੰਗ ਵਿਖੈ ਅਰਿ ਨਾਮ ਸੋ ਸੁਨ ਕਹਿ ਧੁਨ ਬਾਸਰੀ ਕੀ ਤਨ ਬੀਜ ਰਹੀ ਤਿਨ ਕੇ ਸੁਧੂ ਨਾਮ ਤਾ ਸੁਧਗੀ ਸੁਰ ਕੇ ਸੁਨਹੀ ਰਹਾਗੀ ਏ ਮਨੋ ਚਿਤਰ ਨਮੂਨਾ ਰੀਦ ਬਜਾਵਤ ਹੈ ਮੁਰਲੀ ਹਰ ਪੈ ਮਨ ਮੈ ਕਰ ਸੰਕ ਕਛੂ ਨਾ ਜਾ ਕੀ ਸੁਨੇ ਤੁਨ ਸਰਉਨਨ ਮੈਂ ਕਰਕੇ ਖਗ ਆਵਤ ਹੈ ਬਨ ਸੂਨਾ ਸੋ ਸੁਨ ਗਵਨ ਰੀਦ ਰਹੀ ਮਨ ਭੀਤਰ ਸੰਕ ਕਰੀ ਕਛੂ ਨਾ ਨੈਣ ਫਸਾਰਹੀ ਪਿਖ ਕਹਿ ਜਿਮ ਘੰਟਕ ਹੀਰ ਬਜੇ ਮਿਲ ਮੂਨਾ ਸੋਇਆ ਸੁਰਬਾਸਰੀ ਕੀ ਕਬ ਸਾਮ ਕਹਿ ਮੁਖ ਕਾ ਨਰਕੇ ਅਤ ਹੀ ਰਸੀ ਹੈ ਸੋਰਠ ਦੇਵ ਗੰਧਾਰ ਵਿਭਾਸ ਬਿਲਾਵਲੂ ਕੀ ਸੋਤਾਨ ਬਸੀ ਹੈ ਕੰਚਨ ਸੋ ਜਿਹ ਕੋ ਤਨ ਹੈ ਜਿਹ ਕੇ ਮੁਖ ਕੀ ਸਮ ਹੈ ਤਾਕੇ ਵਜਾਏ ਪੇ ਕਹੋ ਸੁਨ ਕੈ ਮਾਤਿ ਕੀ ਤਹਿ ਬੀਜ ਫਸੀ ਹੈ ਦੇਵ ਗੰਧਾਰ ਮਿਵਾਸ ਬਿਲਾਵਲ ਸਾਰੰਗ ਕੀ ਤੁਨ ਤਾ ਮੈਂ ਵਸਾਈ ਸੋਰਠ ਸੁਦਮਲਾਰ ਕਿਦੋ ਸੁਰਮਾਲ ਸ੍ਰੀ ਕੀ ਮਹਾ ਸੁਦਦਾਈ 모ਹੇ ਰਹੇ ਸਭ ਹੀ ਸੁਰਯੋ ਨਰਗਵਾਰਨ ਰੀਜ ਰਹੀ ਸੁਨ ਧਾਈ ਯੋ ਉਪਜੀ ਸੁਰ ਚੇਟਕ ਕੀ ਭਗਵਾਨ ਮਨੋ ਧਰ ਭਾਸ ਚਲਾਈ ਹਨਨ ਹੈ ਜਿਹ ਕੋ অতি ਸੁੰਦਰ ਕੰਧ ਧਰੇ ਜੋ ਹੈ ਪਟ ਪੀ ਲੋ ਜਾਹੇ ਮਰਿਓ ਅਗਨਾਮ ਬਡੋ ਰਿਪ ਤਾਤ ਰਖਿਓ ਅਹ ਤੇ ਦਿਨ ਲੀਲੋ ਅਸਾਧਨ ਕੋ ਸਿਰ ਜੋ ਕਟਿਆ ਅਰ ਸਾਧਨ ਕੋ ਹਰਤਾ ਜੋ ਹੀਲੋ ਚੋਰ ਲਇਓ ਸੁਰ ਮਨ ਤਾਸ ਬਜਾਏ ਭਲੀ ਬਿਦ ਸਾਥ ਰਸੀਲੋ ਜਾਹੇ ਬਵੀਚਨ ਰਾਜ ਦਇਓ ਵਰ ਰਾਵਨ ਜਾਹੇ ਮਰਿਓ ਕਰ ਕਰੋਹੈ ਚੱਕਰ ਕੇ ਸਾਥ ਕਿਦਉ ਜਨਹੂ ਸਿਸ ਭਾਰ ਕੋ ਸੀਸ ਕਟਿਓ ਕਰਛੋ ਹੈ ਮੈਨਸੋ ਆਉ ਸੀਯ ਕੋ ਭਰਤਾ ਜਿਹ ਮੂਰਤ ਕੀ ਸਮ ਕੋ ਹੈ ਸੋ ਕਰ ਲੈ ਆਪਣੇ ਮੁੱਲੀ ਅਬ ਸੁੰਦਰ ਗੋਪਨ ਕੇ ਮਨ 모ਐ ਸਯਾ ਰਾਧਿਕਾ ਚੰਦਰਪਗਾ ਮੁਗੰਦ ਸੋ ਖੇਲਤ ਹੈ ਮਿਲ ਖੇਲ ਸਵੇ ਮਿਲ ਸੁੰਦਰ ਗਾਵਤ ਗੀਤ ਭਲੇ ਸੋ ਬਜਾਵਤ ਹੈ ਕਰ ਤਾਲ ਦਵੇ ਹੁਨ ਤਿਆਗ ਸਵੇ ਸੁਰ ਮੰਡਲ ਕੋ ਸਭ ਕੌਤਕ ਦੇਖਤ ਦੇਵ ਸਵੇ ਅਬ ਰਾਖ ਸਮਾਰਨ ਕੀ ਸੋ ਕਥਾ ਕਛ ਥੋਰੀ ਅਹੈ ਸੁਨ ਲਿਹੋ ਅਬੈ ਨਾਚਦ ਥੀ ਜਿਹ ਗਵਨੀਆਂ ਜਾਹ ਫੂਲ ਖਿਰੇ तीर बह जमुना जा सुंदर कान हली मिलगी तू चारन खेद करै अति हित सो न कछु मन पीतर सं कह धारै रीज कवित पढे रस गे बहसै दो आपस में नहीं हारै हत जखज गोपन कहो नव को देवदासिया आवत थो एक जखज बडो एहरास को कहत ताहे ਗਵਾਰਨ ਲੈ ਸੋ ਚਲਿਓ ਨਭ ਕੋ ਕਿਨਹੁ ਤਹ ਭੀਤਰ ਤੇ ਨਹੀਂ ਟੋਕਿਓ ਜਿਉ ਮਦ ਪੀਤਰ ਲੈ ਮੁਸਲੀ ਹਰ ਕੇ ਹ ਹੈ ਮ੍ਰਿਗ ਸੋਰੇ ਪਰੋਕਿਓ ਸੋਇਆ ਜਖੜ ਕੇ ਸੰਕਿਰੋ ਮੁਸਲੀ ਹਰ ਜੁਦ ਕਰਿਓ ਅਤ ਸੰਭਾਰਿਓ ਲੈ ਤਰ ਵੀਰ ਕਰ ਭੀਤਰ ਭੀਮ ਭਏ ਅਤ ਹੀ ਬਲ ਧਾਰਿਓ ਦੈਤ ਪਛਾਰ ਲਿਓ ਇਹ ਪਾਂਤ ਕਬੈ ਜਸਤਾ ਛਬ ਆਇ ਸੂਚਾਰਿਓ टोके छुटे ते महा छुधवानम किदो चकवा उठ बाजे मारियो इत श्रीब चित्रनाड ग्रंथे कृष्णा अवतारे कोप छुराए वो जखत बधा